ਕਿਮਾ ਬਿਹੂਣੇ ਖੱਪ ਗਏ ਖੂਹਣ ਲੱਖ ਸੰਖ ਗਣਤਣਾ ਆਵੇ ਕਿਉ ਗਣੀ ਖੱਪ ਖੱਪ ਮੋਏ ਬਿਸੰਖ ਜੇਦਾਂ ਨੂੰ ਹੋਲੇ ਕੱਪ ਗਏ ਨਿਦਾਨਸ ਬਾਹਾਂ ਦੇ ਛੱਡੀ ਨਾ ਹਾਂਜੀ ਜੇ ਤਵਾ ਦੇ ਬਹੂਲੇ ਆਏ ਨੇ ਨਿਦਾਨੇ ਛੱਡਿਆ ਇਹਨਾਂ ਨੇ ਭਰੇਵ ਛੱਡਿਆ ਨਹੀਂ ਇਹਨਾਂ ਨੇ ਲੋਭ त्यागਿਆ ਨਹੀਂ ਇਹਨਾਂ ਨੇ ਹੁਦਦੇ ਛੱਡੀ ਨਹੀਂ ਉਹ ਖਾਪਦੇ ਸਾਰੇ ਇੱਥੇ ਹੀ ਕਿੰਨੇ ਖਾਪਦੇ ਖੂਨ ਲੱਖ ਹਲਕਾ ਇੱਕ ਲੱਖ ਖੂੜੀ ਖਾਪਦੇ ਹੋਰੇ ਅੰਗੇ ਕਸ਼ੂੜੀ ਵੀ ਗਲਤੀ ਬਹੁਤ ਜ਼ਿਆਦਾ ਅਰਬਾਂ ਖਰਬਾਂ ਦੀ ਕੁਸੂਰੀ ਦੀ ਗਿਣਤੀ ਬੁੱਧੀ ਜਾਂਦੀ ਸੀ ਅੱਛਾ ਜੀ ਉਹ ਖੂਲ ਗਿਆ ਹੈ ਠੀਕ ਹੈ ਕੋਣ ਜੀ ਜਰੂਰੀ ਗਣਤ ਨਾ ਆਵੇ ਕਿਉਂ ਗਣੀ ਕੱਪ ਮੂਵੇ ਬਿਸੰਖ ਗਣਤ ਨਾ ਆਵੇ ਜਿਹੜੀ ਗੰਦੀ ਆਪਾਂ ਕਰੇ ਨਹੀਂ ਸਕਦੇ ਉਹਨੂੰ ਗਿਣਦੀ ਲੋੜ ਵੀ ਕੀ ਹੈ ਕਿਉਂ ਗਣੀ ਆਪਾਂ ਗਏ ਵੀ ਆਪਣਾ ਦੇਖਿਆ ਕਰਨਾ ਨਹੀਂ ਹਾਂ ਖਾਬ ਖਾਬ ਹੋਏ ਕਹਿ ਦੋ ਬਖਾਬ ਦੇ ਕੇ ਹਾਂ ਹਾਂ ਸਭ ਕਿਆਦੋ ਰਹਤੇ ਮਰ ਗਏ ਹਾਂ ਇਹਨੂੰ ਲੋੜ ਹੈ ਢਿਲਵੇ ਸਾਨੂੰ ਲੋੜ ਨਹੀਂ ਢਿਲਦੀ ਅੱਛਾ ਠੀਕ ਹੈ ਜੀ ਦਸੰਕ ਤੋਂ ਮਤਲਬੰਦਾ ਹੈ ਸਿਗੇਰਾ ਅਸੀਂ ਜਾਣਾ ਦੀ ਐ ਇੱਦੇ ਇੱਧਰ ਖੱਬ ਕੇ ਮਰ ਕੇ ਅਸੀਂ ਇਹ ਰਸਤੇ ਜਾਣਾ ਦੀ ਆਪਣਾ ਬੰਦ ਨਾ ਪਾਏ ਸ਼ਬਦ ਮਹਿ ਲਗਨ ਬਚਾਲੇ ਆਪਣ ਬੰਦ ਨਾ ਪਾਏ ਜੇ ਆਪਣਾ ਖਰਸਬੂ ਪਛੋਣ ਲਵੇ ਤਾਂ ਅੰਦ ਖੁੱਲ ਜਾਂਦੀ ਹੈ ਸਾਫੜਦੀ ਜੜ ਤਾਂ ਅੰਦਰ ਖੁੱਲ ਜਾਂਦੀ ਹੈ ਇਨਾ ਆਪਣਾ ਮੰਨਦੀ ਸੀ ਪਰਾਇਆ ਸੀ ਹੁਣ ਆਪਣਾ ਮੰਨਦੀ ਦੀ ਫੇਰ ਖੰਡ ਪੈਦੀ ਹੁੰਦੀ ਇੱਕ ਵਾਰ ਖੁੱਲ ਜਾਏ ਅੱਛਾ ਜੇ ਇੱਕ ਵਾਰ ਗੰਡਾ ਖੁੱਲ ਜਾਏ ਨਾ ਬਾਹਾਨਾ ਇੱਕ ਵਾਰ ਗੰਡਾ ਖੋਲ ਲਵੇ ਤੇ ਦਵਾਰਾ ਨਹੀਂ ਪਾਸ ਹੁੰਦਾ ਕੋਈ ਜੇ ਦਵਾਰਾ ਇੱਕ ਵਾਰ ਪਿਆਸ ਦੇ ਫੇਰ ਹੀ ਦਵਾਰਾ ਨਾਲ ਕੋਈ ਕੀ ਪੜਦਾ ਹੁੰਦਾ ਖੁੱਲੇ ਗਾਣ ਨਾ ਪਾਏ ਕਸਮ ਪਛਾਣ ਹੈ ਆਪਣਾ ਖੁੱਲ੍ਹੇ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਮੁਖ ਪਾਏ ਮੁਖ ਪਾਏ ਜਦੋਂ ਮਹਿਲੀ ਮੁਖ ਪਾਏ ਸ਼ਬਦ ਹੈ ਮੁਖ ਪਾਏ ਜਿਹਦੇ ਵਿੱਚ ਮਹਿਲੀ ਖਰਾ ਤੂੰ ਇਹਦੇ ਅੰਦਰ ਸ਼ਬਦ ਹਿੰਦੇ ਵਿੱਚ ਹੈ ਗੁਰਬਾਣੀ ਇਹਦੇ ਹਿਰਦੇ ਵਿੱਚ ਖਰਾ ਖੰਭਦਾ ਹੈ ਮਹਿਲ ਦੇ ਵਿੱਚ ਮਹੱਲੀ ਖਰਾ ਤੂੰ ਜਿਦਾਂ ਸਾਥ ਕੇ ਸੁਗ ਪਾਏ ਉਹਦੇ ਅੰਦਰ ਉਹਨੇ ਸਭ ਕੁਝ त्यागਿਆ ਹੈ ਪਾਏ ਗੁਰਬਾਣੀ ਕਿੱਕ ਦੀ ਧਾਣੇ ਜੇ ਸਭ ਕੁਝ ਛੱਡ ਦਵੇ ਜਿੰਨਾ ਜਰ ਸਭ ਕੁਝ ਛੇਡਦਾ ਪਾਇਆ ਨਾ ਗੁਰਬਾਣੀ ਹਿਰਦੇ ਚ ਕਿੱਕ ਦੀ ਹੋਦੀ ਹੈ ਕਿਤਾਬ ਅਕਾਲੀ ਜੋ ਲਾਲਵੇ ਸਦਾ ਜੀ ਜੇਗਦੀ ਸਾਡੇ ਜੀ ਝੋਟਦੀ ਲੱਗਦਾ ਹੁੰਦਾ ਇਹ ਝੋੜ ਇਹ ਕਰਦੀ ਹਾਂ ਜੀ ਤੇ ਆਪੇ ਬਾਹਰ ਚਲੀ ਜਾਂਦੀ ਏ ਤੋਂ ਖਰਚ ਕਰਾ ਤਨ ਧਿਆਨ ਤੂੰ ਆਪੇ ਵਸੈ ਸ਼ਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮੰਤਿਰ ਹਾ ਜੀ ਰਗਾਂ ਨੂੰ ਧਿਆਨ ਤੋਂ ਹਰਜੇ ਧਨ ਨੂੰ ਫਰਾਤਨ ਧਿਆਨ ਜੇ ਤੂੰ ਵਰਜੀ ਖਰਚ ਕਰ ਸੈਨ ਲਾ ਕੇ ਰੱਖ ਧਿਆਨ ਦੇ ਸਰ ਕਿ ਹੋਣਾ ਤੇਰਾ ਤੇ ਆਨਤੂ ਧਿਆਨ ਲੈ ਕੇ ਰੱਖਦੇ ਧਿਆਨ ਜੋੜ ਕੇ ਰੱਖਦੇ ਇਹੀ ਕਰ ਕਿ ਆਪੇ ਬਸੇ ਸਰੀਰ ਇਹ ਧਿਆਨ ਅਜਿਹਾ ਰਹਿਣਾ ਸਰੀਰ ਚਾਹਵੇਂ ਆਬਸੂਆ ਠੀਕ ਹੈ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮੰਤਿਰ ਵਰਤਨ ਦੁੱਖ ਜਾਪੇ ਸਦਾ ਕਰਕੇ ਮੁਖ ਕਰਕੇ ਜਪੇ ਸਦਾ ਸਦਾ ਜਪੂਗਾ ਪ੍ਰਗਟ ਹੋਊਗਾ ਲੋਕਾਂ ਨੂੰ ਪਤਾ ਲੱਗ ਜੂ ਕਿ ਹਾਂ ਉੱਧਰ ਬਸਦਾ ਹੈ ਸਬੂਤ ਹੋ ਜੂ ਕੋਲੋਂ ਅੰਦਰ ਕੋਲੋਂ ਨਹੀਂ ਹੋਤੀਗਾ ਉਹ ਇਹ ਨਹੀਂ ਜਾਂਦੀ ਉਹਦੇ ਹੋ ਜਾਣਗੇ ਆਪੇ ਤਸੇ ਸਰੀਰ ਦੇ ਬਾਅਦ ਇਹ ਸਿੱਤਮ ਨੇ ਖਾਰੇ ਆਪੇ ਬਸੇ ਸਰੀਰ ਦਾ ਸਬੂਤ ਹੈ ਠੀਕ ਹੈ ਆਪੇ ਸਰੀਰ ਹੈ ਮੇਜੜ ਇਹਦਾ ਸਬੂਤ ਕੀ ਹੈ ਵਨ ਤਨ ਮੁਖ ਆਪੇ ਮਨ ਤਨ ਮੁਖ ਜੱਤ ਸਦਾ ਹਾਂਜੀ ਗੁਣ ਅੰਤਰਮਨ ਬਸ ਇਹਦਾ ਸਬੂਤ ਹੈ ਸ੍ਰੀਤੋ ਮਤਲਬ ਭਾਵ ਕੀ ਹੈ ਜੀ ਮਨ ਦੇ ਵਿੱਚ ਇਹ ਦੇ ਵਿੱਚ ਠੀਕ ਹੈ ਸੀ ਬੀਜੋ ਵਤ ਵਿਕਾਰ ਜੰਤੁ ਪਾਏ ਵਿੱਚ ਪਾਇਨ ਕਰਤਾ ਅਲਗ ਅਪਾਰ ਮੈਂ ਕਪੈ ਖਪਾਏ ਸੀ ਤੁਹਾਨੂੰ ਜੀ ਖਬਰ ਹੈ ਇਹ ਉਹ ਖਾਪ ਹੀ ਜਾਣ ਕੇ ਰਿਆ ਹੋ ਬਿਆਰ ਨੂੰ ਅੱਛੇ ਇਹ ਕਪੜੇ ਨੇ ਤੇ ਉम्मे ਧਪੈ ਕਪਾਈ ਸੀ ਦੇ ਛਿਟਕੀਤੀਆਂ ਹਾਂਜੀ ਬੁਕਾਰਾਂ ਨਹੀਂ ਛਿਟਕੀਤੀਆਂ ਖਬਰੇ ਨੇ ਉਹ ਖਬਰੇ ਨੇ ਪੱਜੇ ਬਦਦਨ ਦਾ ਜੰਤੋ ਭਾਇ ਕਿ ਭਾਇ ਨੂੰ ਕਰਤਾ ਅਲਗ ਅਪਾਰ ਜੰਤੋ ਭਾ ਜੰਤੋ ਭਾਇ ਨੇ ਵਿੱਚ ਭਾਇਨ ਵਿੱਚ ਭਾਇ ਨੂੰ ਕਿੱਝ ਅਲਗ ਭਾਇ ਨੇ ਜੀਵਾਂ ਨੇ ਕਰਤਾ ਕਰਤਾ ਅਲਗ ਅਪਾਰ ਕਰਤਾ ਅਲਗ ਅਪਾਰ ਕਰਤਾ ਕਿ ਜਾ ਲਹਿ ਰਹੇ ਹੈ ਉਦੇਸ਼ ਉਹ ਖਫਾਇਦ ਹੈ ਖਾਤਰੀ ਦੇਣਾ ਆਪ ਨੂੰ ਫੇਰ ਵੀ ਨਾਲ ਇਹਨਾਂ ਨੇ ਉਹ ਕਹਿੰਦਾ ਤੁਸੀਂ ਮਾਇਆ ਦੀ ਖੇਡ ਕਰਨੀ ਆਖਦੀ ਖੇਡ ਖੇਡੀ ਮਾਇਆ ਦੀ ਅੱਗ ਦੀ ਖੇਡ ਹੈ ਤੁਸੀਂ ਅੱਗ ਦੀ ਰੇੜ ਲਓ ਨਾਮ ਨਹੀਂ ਖੇਡ ਛੇੜਦੇ ਮੈਂ ਉਹ ਜ਼ੋਰ ਦੀ ਖੇਡ ਨਾਮ ਨਹੀਂ ਛੇੜਿਆ ਲੈ ਤਾਂ ਖੋਜਾ ਹੋ ਉਹਨਾਂ ਨੇ ਤਾਂ ਨਾਲ ਖੇਡਦਾ ਅੱਗਾਂ ਵਾਲਿਆਂ ਦੇ ਬਰੇ ਲਿਖਦੇ ਹੋ ਕਹਿੰਦੇ ਤੁਸੀਂ ਖੇਡ ਲਓ ਬੇਦੀ ਗੱਦੀ ਇਹਦੇ